ਸ਼ਲੋਕ ਮਹੱਲਾ ਤੀਜਾ ਸਭ ਕਿਛ ਹੁਕਮੈ ਆਪਦਾ ਸਭ ਕਿਛ ਹੁਕਮੈ ਜਾਏ ਜੇ ਕੋ ਮੂਰਖ ਆਪੋ ਜਾਣੇ ਅੰਦਾ ਅੰਦ ਕਮਾਏ ਆਪਾਂ ਸੋਹੀ ਕਹ ਲਾਹੀ ਨਾ ਸਭ ਕੁ ਤੇਰੇ ਬਸ ਦੇ ਵਿੱਚ ਹੈ ਜੋ ਉਹਦਾ ਹੁਕਮ ਦੇ ਅੰਦਰ ਜੰਗਲ ਹੁਕਮ ਦੇ ਕੁਛ ਚੰਦ ਸੂਰਜ ਉਹਦੀ ਰਜਾ ਚ ਦੇ ਇਹ ਕੋ ਮੂਰ ਕ ਆਪਣਾ ਤਾਂ ਪ੍ਰੇਵੀ ਮੈਂ ਆ ਕਰ ਸਕਦਾ ਨਹੀਂ ਕਈ ਕਹਿਦੇ ਨੇ ਸੁਤਮਈਏ ਜੀ ਪੀ ਪੁੱਤ ਦੇ ਦਰਦ ਨੇ ਆ ਕੁਛ ਉਹ ਕਰਾਮਤ ਹੈ ਜੋ ਹੈ ਿਆ ਉਹ ਇਹਦੇ ਜੋੜੀਆਂ ਹੋਈਆਂ ਨੇ ਸੂਰਜ ਨੂੰ ਖੜਾ ਉਹ ਸਭ ਕਹਦੇ ਬਕਵਾਸ ਬਿਲਕੁਲ ਗਲਤ ਹੈ ਉਹ ਅੰਧੇ ਅੰਧਕਵਾਂਣ ਵਾਲੀ ਗੱਲ ਉਹ ਨੇਰੇ ਦੇ ਤੀਰ ਤੋਂ ਕੁਛ ਨਹੀਂ ਆਉਂਦਾ ਰੱਖਿਆ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਠੀਕ ਹੈ ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸ ਨੂੰ ਕਿਰਪਾ ਕਰੇ ਰਜ਼ਾਈ ਨਾਲ ਜਰਾ ਮੈਂ ਕੋਈ ਫਿਰਲਾ ਗੁਰਮੁਖ ਕੋ ਬੁੱਝਦਾ ਹੈ ਠੀਕ ਉਹ ਕਿਰਪਾ ਕਰ ਲਵੇ ਉਹ ਆਪਣੀ ਮਰਜੀ ਉਹ ਆਪਣੀ ਮਰਜੀ ਨਾਲ ਕਿਰਪਾ ਕਰਦਾ ਹੈ ਕੋਪਾ ਦਾ ਵੀ ਕੋਈ ਉਹ ਕੋਈ ਕਿਤੇ ਤੋਂ ਸਵਾਰਥ ਜਾਂ ਜ਼ੋਰ ਵੀ ਪਾਇਆ ਜਾ ਸਕਦਾ ਵੀ ਵੀਰੇ ਤੇ ਕਿਰਪਾ ਕਰ ਰਿਹਾ ਕੋਈ ਸਵਾਰਥ ਹੈ ਵੀ ਤੂੰ ਇਹਨੇ ਤੇ ਕਿਰਪਾ ਕਰ ਨਹੀਂ ਇਹ ਐਸਾ ਨਾ ਸਰ ਇਹਨੂੰ। ਇਹ ਵੀ ਭੇਦ ਦੀ ਸੀ ਦੱਸ ਥਾਦ ਦੇ। ਕੋਲ ਨਾ ਜਵਾਬ ਨਹੀਂ ਆ ਥਾਦ ਦੇ। ਗੁਰਮੁਖ ਨੇ ਹੁਕਮ ਬੁੱਝ ਲੈ ਹਾਂ ਗੁਰਮੁਖ ਉਹ ਗੁਰਮੁਖ ਬੱਲੇ ਬੱਲੇ ਗੁਰਮੁਖ ਦੇ ਰਹੀ ਨਾ ਕੁਛ ਉਹਦੇ ਬਾਰੇ ਦੱਸਿਓ। ਹੋ ਗੋ ਬੁੱਝਾਇਆ। ਠੀਕ ਹੈ ਜੀ। ਮਹੱਲਾ ਤੀਜਾ ਸੋ ਜੋਗੀ ਜੁਗਤ ਸੁਪਾਏ ਜਿਸਨੂੰ ਗੁਰਮੁਖੀ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਦੇਖੀ ਜੋਗ ਨਾ ਹੋਏ ਹਾਂ ਉਹ ਇੱਕਦਾਂ ਜੋਗੀ ਪ੍ਰੇਖ ਆਲੇ ਦੇ ਹਾਂਜੀ ਜਿਦਾ ਸਾਡੀ ਦੀ ਗੀਰਾਂ ਨਾਲ ਗੱਲ ਹੁੰਦੀ ਰਹੀ ਹੈ ਜੋਗੀ ਸ਼ਬਦ ਤੋਂ ਉਹਨਾਂ ਤੋਂ ਤਿਰਕਾਰ ਨਹੀਂ ਹੈ ਜੋੜਨਾ ਜ਼ਰੂਰ ਹੈ ਅਸੀਂ ਇਹ ਸਵਾਲ ਇਹ ਇਹ ਸਮਝ ਨਹੀਂ ਜੀ ਜਿਹੜੂ ਹੈਗੀ ਕਿਹਦਾ ਹੁਕਮ ਚੱਲਦਾ ਸਮਝ ਕੇ ਨਾ ਇਹ ਗੁਰੂ ਮੁਖਾਂ ਨੂੰ ਆਈ ਹੈ ਜਿਨ੍ਹਾਂ ਨੇ ਨਾਮ ਹੁਕਮ ਪਛੜੇ ਉੱਤੇ ਹੁਕਮ ਪਛਾਣਨ ਦੀ ਗੱਲ ਨਾ ਬਿਰਲੇ ਕੋਈ ਹੁਕਮ ਪਛਾਣਦੇ ਹਾਂਜੀ ਬੁੱਝਣ ਦੇ ਇਹ ਆ ਨਾ ਨਾਮ ਹੁਣ ਲਫ਼ਜ਼ ਨਾਮ ਕੀ ਹੁੰਦਾ ਨਾਮ ਤਾਂ ਫਿਰ ਗੁਰਬਖਾਂ ਦਾ ਵੀ ਇਹਦਾ ਮਤਲਬ ਹੈ ਗੁਰੂ ਨਾਮ ਦੀ ਹੈ ਬਾਹਲਾ ਤੇ ਨਾਲਾਂ ਗੁਰਬੁਖੀ ਹੋ ਗਈ ਗੁਰਬੁਖੀ ਦਾ ਗੁਰੂ ਜਪਤੇ ਦੇ ਫੜ ਮਾਣੁਖੀ ਨਾ ਗੁਰਮੁਖੀ ਨਾਮ ਪ੍ਰਾਪਤ ਹੋਏ ਗੁਰਮੁਖੀ ਨਾਮ ਜਿਹੜਾ ਗੁਰਮਖਾਲਾ ਜਿਹਨੂੰ ਪ੍ਰਾਪਤ ਹੋ ਜਾਏ ਜਿਹੜਾ ਗੁਰਮੁਖ ਨਾਮ ਕਹਿੰਦੇ ਉਹ ਪ੍ਰਾਪਤ ਹੋ ਗਿਆ ਸੱਚ ਦਾ ਗਿਆਨ ਪ੍ਰਾਪਤ ਹੋ ਗਿਆ ਆਪਣਾ ਜੁੜ ਜਾਣ ਗੁਰਬਾਣੀ ਦੀ ਉਹ ਹਾਰ ਤੋਂ ਉਹ ਚੁਣ ਲੈ ਸੁਣ ਲਓ ਉਹ ਗੁਰਮੁਖੀ ਲੋਬੇ ਇਹਦੇ ਲੋਬੇ ਗੁਰਬਾਣੀ ਹਾਲਾਂਕ ਸਮਾਇਆ ਇਹਦੀ ਜੋਗੀ ਕੀ ਨਗਰੀ ਸਭ ਕੋਲ ਉਹ ਜੋਗੀ ਨਹੀਂ ਜਿਹੜੀ ਨਗਰੀ ਹੈ ਉਹ ਸੱਚ ਹੁੰਦੀ ਹੈ ਜੁੜਿਆ ਹੋ ਆਪਣੇ ਗੁਰੂ ਜੀ ਨਾਲ ਉੱਧਰ ਸਾਰੇ ਵਸੇ ਨੇ ਜਾਂ ਉੱਥੇ ਬਸਣਾ ਸਭ ਨੇ ਜਾ ਕੇ ਠੀਕ ਹੈ ਜੀ ਆਖਰ ਕਾਲ ਜਿੱਦ ਕਰਕੇ ਬਸਾ ਹੁੰਦਾ ਜਾਂ ਕੇ ਉਹਨਾਂ ਜਿਹੜੇ ਪਾਸਤਾਨੀ ਹੈਗਾ ਟਿਕੜਾ ਵੀ ਉਹ ਲੋਕ ਜਾਲ ਨੂੰ ਬਸਣਾ ਕਰਦੇ ਸਭ ਕੋ ਉੱਥੇ ਜਾ ਕੇ ਟਿਕਦਾ ਬਸਦਾ ਜਾ ਕੇ ਜਿੱਦ ਗੁਰਪਖੀ ਲੋ ਬਣ ਜਾਂਦਾ ਉਹ ਜੋਗੀ ਜਿੱਥੇ ਜੁੜਿਆ ਹੋਇਆ ਜਿੱਥੇ ਗੁਰਦਾਨਾ ਦੇ ਜੋਗੀ ਜੁੜੇ ਹੋਏ ਆ ਕੇ ਜਾਂ ਫਤ ਜੋਗ ਜੁੜੇ ਰਿਹਾ ਕੇ ਉੱਥੇ ਜਿਹੜਾ ਵੀ ਜੁੜ ਜੁੜ ਟਿਕ ਜੂ ਉਹ ਨਾ ਬੋਲ ਟਿਕ ਜੂਗਾ। ਪੇਖੀ ਜੋਗ ਨਾ ਹੋਏ। ਆ ਜਿਹੜੇ ਪੇਖ ਕੇ ਬੈਠੇ ਇਹ ਇਹ ਜੋਗ ਜੁੜਿਆ ਨਹੀਂ ਜਾ ਸਕਦਾ। ਇਹ ਜੋਗ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ। ਨਾਲ ਜਿਹੜਾ ਸੱਚ ਦਾ ਗਿਆਨ ਪ੍ਰਗਟ ਹੋ ਜਵੇ। ਦੇਖੋ ਇੱਕ ਅੰਦਰੋਂ ਗਿਆਨ ਪ੍ਰਗਟ ਹੋਵੇ। ਇੱਕ ਅਸੀਂ ਬਾਹਰੋਂ ਫੜ ਕੇ ਪੁੱਜਣ। ਤਾਰੋਂ ਭੜਕੇ ਲਈ ਬੁਝਿਆ ਜਾ ਸਕਿਆ ਗੁਰਬਾਣੀ ਨੂੰ ਬਾੜੀ ਕਰਦੋ ਫਟਾਪੀ ਕਰਦੋ ਜੇ ਨਾ ਜਰੂ ਕ੍ਰਿਪਾਲਨ ਕਰੇ ਸਰੂਆਣਾ ਪ੍ਰਗਟ ਹੋਵੇ ਬਹੁਤ ਸਾਰੀਆਂ ਬੁਝਾਰਤਾਂ ਨੇ ਜਿਹੜੀਆਂ ਨਹੀਂ ਬੁਝੀਆਂ ਜਾ ਕਰਕੇ ਜਿਹੜੇ ਵਿਦਵਾਨ ਨੇ ਹਰ ਹੋਰ ਨੂੰ ਕਹਿੰਦੇ ਨੇ ਕਿ ਤੁਸ ਕੱਢ ਲੈਂਦੀ ਜੀ ਗੱਲ ਇਹ ਕੀ ਆਧਾਰ ਹੈ ਤੁਹਾਡਾ ਇਸ ਗੱਲ ਤੇ ਠੀਕ ਹੈ ਨਾ ਜਦ ਵੀ ਨਾਮ ਪ੍ਰਗਟ ਹੁੰਦਾ ਇਹ ਦਇਆ ਹੀ ਹੁੰਦਾ ਰੋਈ ਕਿ ਸਤਗੁਰੂ ਮੇਰਾ ਦੀਜੀਤ ਲੋਭ ਠੀਕ ਹੈ ਜੀ। ਕੁੜ ਵੀ ਇਹਨੂੰ ਦੁਬਈ ਕਿਹਾ ਜਾਊਗਾ ਪਿੱਛੇ ਹੈਰੀਏ ਦਾ ਪ੍ਰਚਾਰ ਹੈ ਨਹੀਂ। ਜਦੋਂ ਲੱਗਦਾ ਸਾਨੂੰ ਪਰ ਇਹ ਆਦ ਸੱਚ ਹੈ। ਸਾਨੂੰ ਨੂੰ ਲੱਗਦਾ। ਸਾਡੇ ਪ੍ਰਗਟ ਹੋਇਆ ਜਦ। ਹਾਂ ਆਪੇ ਜਨਤ ਪਾਈਨ ਆਪੇ ਆਧਾਰ ਆਪੇ ਸੂਖਮ ਭਾਲੀਏ ਆਪੇ ਪਾਸਾਰ। ਆਪੇ ਜਨਤ ਪਾਈਨ ਆਪੇ ਜਨਤ ਪਹਿਲਾਂ ਕੀਤਾ। ਆਪੇ ਦਾ ਹੁਕਮ ਹੁਕਮ ਦਾ ਆਗਿਆ ਪੁਰੀ ਕਰ ਦਿੱਤਾ ਹੁਕਮ ਹੈ ਆਸਰਾ ਸਭ ਦਾ ਆਪੇ ਸੁਖ ਭਾਲੀ ਆ ਇਹ ਹੁਣ ਸੁਖ ਨੂੰ ਅਸੀਂ ਆਪਣਾ ਆਪੇ ਫਰਮਾਉਂਦੇ ਤੁਹਾਨੂੰ ਜੋ ਜੋ ਤੈਨੂੰ ਆਪਣਾ ਆਪੇ ਖੋਜਣ ਇਸ ਮਨ ਕੋਈ ਖੋਜੋ ਭਾਈ ਗੁਰ ਕੋ ਖੋਜਣ ਆਪਰੇ ਬੋਲੂ ਆਪੇ ਖੋਜੋ ਕੋਈ ਨਾ ਵਿਸ਼ਾ ਆਪੇ ਸੁਖ ਭਾਲੀ ਆਪੇ ਬਸ ਜੇ ਜੋ ਕੋ ਇਸ ਪਸਾਰੇ ਦੇ ਵਿੱਚ ਹੈ ਸਾਰੇ ਚ ਆਪਣਾ ਆਪ ਹੀ ਖੋਜਣਾ ਹੈ ਆਪਣਾ ਆਪਾ ਸੁਖਮੇ ਜੇ ਸੁਖਮੇ ਖੋਜਣਾ ਤਾਂ ਆਪਣਾ ਆਪ ਹੀ ਖੋਜ ਲਓ ਸਾਡਾ ਸੁਖ ਸਮਝ ਆ ਜੂਗਾ ਠੀਕ ਹੈ ਆਪ ਇਕਾਂਤੀ ਹੋਏ ਬੈਠਾ ਮੋੜਾ ਸਭ ਆਪੇ ਵੱਡ ਪਰਿਵਾਰ ਜਦ ਪਰਿਵਾਰ ਦੇ ਵਿੱਚ ਆਉਂਦਾ ਵੱਡ ਪਰਿਵਾਰ ਜਿਵੇਂ ਸੰਖਿਆਰੀ ਪਰਿਵਾਰ ਬੜਿਆ ਬੈਠਾ ਆਮੀ ਆਪੇ ਪਰ ਜਿਹੜੇ ਸੱਚਖਣੇ ਜਾਂਦੇ ਬਟਪੁਰ ਬਾਹਰ ਦੇ ਤਾਂ ਵੀ ਆਪੇ ਕੁੜੇ ਸੰਸਾਰੀ ਨੂੰ ਪਰਿਵਾਰ ਬਣਾਣਾ ਇਹ ਅਨਰਾ ਕਾ ਹੀ ਪਰਿਵਾਰ ਬਣਾਵੇ ਇਹ ਹੈ ਤੇ ਕੀ ਹੈ ਠੀਕ ਹੈ ਜੀ ਇਹ ਇਸ਼ਾਰਾ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇਹ ਕਹੇ ਅਨੇਕ ਬਿਲਕੁਲ ਤੁਸੀਂ ਬੋਝ ਨਹੀਂ ਹੈ ਠੀਕ ਹੈ ਜੀ ਨਾਨਕ ਮੰਗੇ ਦਾਨ ਹਰ ਸੰਤਾ ਰੇਣਾਰ ਹੋਰ ਦਾਤਾਰ ਨਾ ਸੁਝਈ ਤੂੰ ਦੇਵਨਹਾਰ ਨਾਲ ਕੇ ਫੈਲਾ ਕਰਦਾ ਮੁggen ਦਾ ਹਨ ਰੋਧ ਕੇ ਦਾਣ ਬੇਗੁਦਰਾ ਹਰ ਸੰਤ ਤੋਂ ਰਹਿ ਨਾਰ ਮੈਂ ਹਰ ਕੇ ਸੰਤਾਂ ਧੂੜ ਆ ਗੁਰਬਾਣੀ ਦਾ ਯਾਰ ਰੁਕਣਾ ਜੇ ਚਲ ਧੂੜ ਹਰ ਸੰਤ ਕੀ ਰਹਿਣ ਪਿਆਰੇ ਹੋਰ ਦਾਤਾਰ ਨਾ ਸਿ ਮੈਨੂੰ ਕੋਈ ਦਾਤਾ ਦਿੱਤਾ ਹੀ ਨਹੀਂ ਕੋਈ ਜਿਸ ਤੱਕ ਪ੍ਰਾਪਤ ਹੋ ਕੋਈ ਕੀ ਨਾਲ ਜਾਣ ਵਾਲੀ ਹੈ ਤੂੰ ਦੇਵਨਾ ਦੇਵਨਾ ਤੂੰ ਸਤ ਕਰਦੇ ਨੇ ਜਿਹੜੀ ਇਹ ਸ਼ਰਤ ਵੀ ਤੇ ਬੋਲਦੇ ਨੇ ਕਹਿਣਾ ਮਤਲਬ ਇਹ ਆਏ ਤਾਂ ਸਮਝ ਆ ਜਾ ਪਰ ਕਾਂ ਰੱਤ ਵੀ ਤੇ ਤਿਸ ਤੋਂ ਹੀ ਉਹ ਤਾਂ ਕਹਿੰਦੇ ਆਪ ਸੱਤਰ ਦੇ ਹੱਥ ਖੜੀ ਕਰਤੇ ਵੀ ਬਲਾਏ ਬੋਲਦੇ ਨੇ ਜੀ ਉਹਦੇ ਤੂੰ ਦੇਵਨਾ ਜਿਹੜਾ ਸਾਕਾ ਨੂੰ ਤੈਨ੍ਹ ਦਿੱਤਾ ਨਾ ਤਾਂ ਉਹ ਦੀ ਤੋੜਨਾ ਹੈ ਆ ਜਿਹੜਾ ਸੰਤ ਕਿਵਟੇ ਵਿਚ ਆ ਕੇ ਆਪਣੇ ਕੋਲੋਂ ਕਰਦਾ ਕਾਹ ਇਹ ਦੀ ਬਾਤ ਆ। ਠੀਕ ਹੈ ਜੀ। ਇਹ ਕੋਈ ਧੀਬੜੀ ਗੱਲ ਆ ਲੁਕੀ ਹੋਈ ਹੋਰ ਦਾਤਾ ਕੋਈ ਵੀ ਤੀਰ ਦਦਾ ਜਾਤਾ ਹੋਰ ਦਾਤਾ ਮਤੂ ਮੇਰੀ ਸਮਝ ਤੋਂ ਪਰੇ ਦੇ ਸਕਦਾ ਹੋਵੇ। ਜੇ ਕੋਈ ਦਾਵਾ ਕਰੇ ਤਾਂ ਬੁਰਖ ਹੈ ਇੱਥੇ ਕਿਵੇਂ ਪੌੜੀ ਸਮਾਪਤੀ ਹੈ ਜੀ ਨਾਲੇ ਵਿਹਾਜੜੇ ਕੀ ਵਾਰ ਇਹਦੀ ਵੀ ਨਾਲੇ ਇੱਥੇ ਸਮਾਪਤੀ ਹੈ ਜੀ